ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਦੇਵ ਸ਼ਬਦੰ ਬ੍ਰਹਮਣੇ ਕਤਰੀ ਸ਼ਬਦੰ ਸੂਰ ਸ਼ਬਦੰ ਹਾਂਜੀ ਖੱਤਰੀਆਂ ਦਾ ਜਿਹੜਾ ਖੱਤਰੀ ਉਹਦਾ ਜਿਹੜਾ ਉਪਦੇਸ਼ ਹੈ ਜੀ ਪਹਿਲਾਂ ਬ੍ਰਾਹਮਣਾਂ ਦੇ ਪਹਿਲਾਂ ਤੋਂ ਲੈ ਕੇ ਪਹਿਲਾਂ ਸੂਰ ਦਾ ਸ਼ਬਦ ਹੈ ਉਹਨਾਂ ਨੇ ਸੂਰਬੀਰਤਾ ਦਾ ਕੱਲਾ ਹੀ ਉਪਦੇਸ਼ ਕਰਤਾ ਖੱਤਰੀਆਂ ਨੂੰ ਛੱਤਰੀਆਂ ਵਾਸਤੇ ਆ ਬ੍ਰह्म ਗਿਆਨ ਦਾ ਛੱਡ ਦਿੱਤਾ ਸਮਝ ਗਏ ਜੀ ਬ੍ਰਾਹਮਣ ਦਾ ਇਹ ਕਰ ਦਿੱਤਾ ਵੀ 베ਦ ਪੜ੍ਹਨੇ ਔਰ ਪੜਾਉਣੇ ਬਸ ਇਹ ਕਰ ਦਿੱਤਾ ਖੱਤਰੀਆਂ ਨੂੰ ਛੱਤਰੀਆਂ ਨੂੰ ਕਹਤਾ ਵੀ ਤੁਸੀਂ ਭਾਈ ਜਿਹੜਾ ਸਾਹਮਣੇ ਮੱਥੇ ਜੁੱਝ ਕੇ ਬਰਜੂਗਾ ਪ੍ਰਾਣ ਦੇ ਦੂਗਾ ਜੰਗ 'ਚ ਉਹ ਸੁਰਗੁਰੂ ਕੋ ਚਲਾ ਜਾਊਗਾ ਜੀ ਨੂੰ ਇਹ ਕਹਤਾ ਜਿਹੜੇ ਸੀਗੇ ਬੈਸ ਸ਼ੁੱਧਰ ਉਹਨਾਂ ਕਹਿੰਦਾ ਵੀ ਤੁਸੀਂ ਸੇਵਾ ਕਰੋ ਜੇ ਵੀ ਖੇਤੀ ਕਰ ਲਈਏ ਵੀ ਸੇਵਾ ਹੀ ਹੈ ਦੂਜੇ ਕੰਮ ਕਰਦੇ ਇਹ ਵੀ ਸੇਵਾ ਹੀ ਹੈ ਵੀ ਸੇਵਾ ਕਰੋ ਤੁਸੀਂ क्षत्रिय ਉਹਦੀ ਬ੍ਰਾਹਮਣਾਂ ਦੀ ਤੁਸੀਂ ਧਰਜੋ ਤੁਹਾਡੀ ਵੀ ਬੁਤੀ ਹੋ ਉਹਨਾਂ ਨੇ ਬੜ ਦਿਤੋਂ ਉਹ ਅਸਲ ਚ ਉਸ ਗੱਲ ਨੂੰ ਕੱਟ ਰਹੇ ਨੇ ਬੇੜ ਵਿੱਚ ਨਹੀਂ ਗੱਲ ਹੈਗੀ ਸਮਰਤ ਸ਼ਾਸਤ੍ਰਾਂ ਦੇ ਵਿੱਚ ਇਹ ਗੱਲ ਹੈ भेद ਵਿੱਚ ਆ ਗੱਲ ਹੈ ਜਿਹੜੀ ਗੁਰੂ ਸਾਹਿਬ ਗੁਰਬਾਣੀ ਚ ਹਾਂਜੀ ਹਾਂ ਜਿਹੜਾ शूद्र शब्द सु आ, प्राकृता है, ਸ਼ਬਦ ਪ੍ਰਾਕ੍ਰਿਤ ਹੈ ਪ੍ਰਾਕ੍ਰਿਤ ਹੈ ਹਾਂ शूद्र ਵਾਸਤੇ ਇੱਕ ਅਰਥ ਸਾਬਿਤ ਤੁਸੀਂ ਭਾਈ ਦੂਜਿਆਂ ਦੀ ਸੇਵਾ ਕਰੋ ਜੀ ਦੂਜਿਆਂ ਵਾਸਤੇ ਕਰੋ ਸੇਵਾ ਜੀ ਹਾਂਜੀ ਸਰਬ ਸ਼ਬਦੰ ਸਾਰਿਆਂ ਨੂੰ ਇੱਕੋ ਹੀ ਉਪਦੇਸ਼ ਹੈ ਅਸਲ ਦੇ ਵਿੱਚ ਇੱਕੋ ਉਪਦੇਸ਼ ਸਾਰੇ ਉਪਦੇਸ਼ ਆ ਜਾਂਦੇ ਜੇ ਇਸ ਗੱਲ ਦਾ ਕੋਈ ਭੇਦ ਦੇ ਉਪਦੇਸ਼ ਦਿੱਤੇ ਨੇ ਵੈਸਾ ਵਿੱਚ ਹੀ ਗਿਣੇ ਨੇ ਇਹ ਸ਼ੂਦਰਾਂ ਦੇ ਵਿੱਚ ਹੀ ਦੇ ਜੀ ਹੀ ਵੈਸਾ ਨੂੰ ਸ਼ੂਦਰਾਂ ਨੂੰ ਕੋਈ ਉਪਦੇਸ਼ ਹੈ ਮੈਂ ਕਹਾਂ ਕਿ ਖੇਤੀ ਵੀ ਸੇਵਾ ਹੀ ਆਉ ਦੂਜੀ ਕੰਮ ਵੀ ਸੇਵਾ ਹੀ ਆ ਹਾਂ ਕਿ ਕੋਈ ਜਿਹੜੀ ਗੁਰਬਾਣੀ ਆ ਦੇ ਚ ਤੱਕਾ ਨੂੰ ਕੋਈ ਉਪਦੇਸ਼ ਇਕੱਠਾ ਜੇ ਕੋਈ ਇਸ ਗੱਲ ਦੇ ਭੇਦ ਨੂੰ ਜਾਣ ਲਵੇ ਉਪਦੇਸ਼ ਉਹ ਕਿਹੜਾ ਜਿਹੜਾ ਤਿੰਨਾ ਵਾਸਤੇ ਉਪਦੇਸ਼ ਜਿਹੜੀ ਚਾਰਾਂ ਵਰਡਾਂ ਨਾਲ ਮੁਕਤੀ ਵੀ ਮਿਲ ਸਕਦੀ ਹੈ ਧਰਮ ਦੇ ਵਿੱਚ ਵੀ ਦਫੁੱਲ ਹੋ ਸਕਦਾ ਆਦਮੀ ਆਪਣਾ ਸੂਰਮਤ ਵੀ ਹੋ ਸਕਦਾ ਰੱਖਿਆ ਵੀ ਕਰ ਸਕਦਾ ਜਿਵੇਂ ਖਾਲਸੇ ਨੇ ਰੱਖਿਆ ਵੀ ਕੀਤੀ ਆਪਣੀ ਵੀ ਲੋਕਾਂ ਦੀ ਵੀ ਜੀ ਧਰਮ ਦੇ ਵਿੱਚ ਵੀ ਪਰਪਤ ਧਰਮaisa ਕੋਈ ਨਹੀਂ ਜੁੜੀ ਜਿਹੜਾ ਖਾਲਸਾ ਦਾ ਧਰਮ ਹੋਵੇ ਤੇ ਸੇਵਾ ਵੀ ਆਪਣੀ ਆਫ ਕਰਦਾ ਹੈ ਜੇ ਕੋਈ ਇਸ ਭੇਦ ਨੂੰ ਜਾਣ ਲਵੇ ਕਿ ਇੱਕੋ ਹੀ ਸ਼ਬਦ ਇੱਕੋ ਹੀ ਉਪਦੇਸ਼ ਕਿਹੜਾ ਉਪਦੇਸ਼ ਹੈ ਜਿਹਦੇ ਵਿੱਚ ਸਾਰੇ ਹੀ ਉਪਦੇਸ਼ ਜਿਹੜੇ ਜarre ਬੰਲਾਂ ਨੂੰ ਸੁਝਾ ਹੋਵੇ ਨਾਨਕ ਤਾਕਾ ਦਾਸ ਹੈ ਸੋਈ ਜੁੜਦੇ ਹੋ ਨਾ ਇਸ ਭੇਦ ਨੂੰ ਜਾਣਦਾ ਹੈ ਲੋੜ ਹੈ ਉਹ ਆਪਣੇ ਜਾਲਣ ਵਾਲਾ ਦਰਜਣ ਮਾਇਆ ਰਹਿਤ ਹੈ ਦਰਜਣ ਦੇ ਹੋ ਭਾਇਆ ਤੋਂ ਅੱਗੇ ਹੈ ਉਹ ਦੇਵਾਇਆ ਰਹਤ ਹੈ ਸੱਚਖੰਡ ਦਾ ਵਾਸੀ ਹੈ ਉਹ ਉਹ ਦੇਵ ਭਾਇਆ ਤੋਂ ਪਾਰ ਜਿਹੜਾ ਇਸ ਪੈਦ ਨੂੰ ਜਾਣਦਾ ਉਹ ਕੌਣ ਹੈ ਹਰਕਤ ਸੇਵਕ ਹੈ ਹਰਕਤ ਸੇਵਕ ਸੋਹਰ ਜਿਹਾ ਭੇਦ ਲਜਾਣੋ ਮਾਨਸ ਦੇ ਹਾਂ ਉਹ ਬਾਬੇ ਬਨਰਜੀ ਦੇ ਵਿੱਚ ਹੈ ਪਰ ਤੁਸੀਂ ਇਹ ਵਧ ਕੇ ਚਲੋ ਬਨਰਜੀ ਦੇ ਵਿੱਚ ਹੈ ਦੀ ਰਹਿੰਦਾ ਹੋਇਆ ਵੀ ਹੈ ਦੀ ਦਰਜਣ ਦੇ ਹੋ ਹਰ ਜੀ ਨਿਰੰਝਨ ਦੇਵ ਦਾ ਕੀ ਅਰਥ ਹੈ ਆਇਆ ਤਾਂ ਰਹਿ ਕੇ ਵਿਗਿਆਨ ਉਗਦਾ ਮਾਇਆ ਜੀ ਵਿਗਿਆਨ ਬੋਲੇ ਨਿਰੰਝਨ ਲਈ ਆਇਆ ਤਾਂ ਰਹਤੋ ਕੇ ਜਿਹੜੀ ਸਰੀਰ ਤੇ ਰਹਿੰਦੇ ਹੋਏ ਸਰੀਰ ਮਾਇਆ ਤੋਂ ਰਹਤ ਹੋ ਕੇ ਰਹੀਏ ਦਿਰਵੋ ਹੋ ਕੇ ਰਹੀਏ ਮਾਇਆ ਵਿੱਚ ਉਦਾਸੀ ਹੋ ਕੇ ਰਹੀਏ